ਪਰਬ ਕੋ ਸਮਰੇ ਸੇਤਰ ਬੰਤੇ ਪਰਬ ਕੋ ਸਿੰਗਰੇ ਸੇਪਤ ਬੰਤੇ ਕਿਉਂ ਕਿਉਂ ਦਾ ਅਸਰ ਦਸ ਪਰਬ ਕਾ ਜਦ ਇਹ ਪ੍ਰਭ ਕੋ ਸਮਝਦਾ ਹੈ ਨੀ ਪਾਪਾ ਸਮਝਾਣ ਵਾਲੀ ਕਿਤਾਬ ਚ ਆ ਗਿਆ ਉਹ ਹੁਣ ਉਹਦਾ ਧਿਆਨ ਕਿੰਨੀ ਦੂਰ ਆਇਆ ਆਇਆ ਆਇਆ ਕਾਇਆ ਆਇਆ ਕਾਇਆ ਬਾਣੀ ਉਥੋ ਤਾਂ ਇਹੀ ਹੋਊਗਾ ਜਦੋਂ ਕਬੀਰ ਰੋਜ ਕਹਿੰਦਾ ਵੇ ਇੱਦ ਟੁੱਟ ਕੋਲੀ ਗਾ ਕਰਾਂ ਨੀ ਦੇਵਤ ਜੀ ਹੋ ਗਏ ਤਾਣਾ ਬਾਣਾ ਕੱਟ ਰੋਸੂ ਜੇ ਹਾਰਾ ਦਾ ਲੱਭਦੇ ਹੋੁਰਵੇ ਜੀ ਅਜ ਵੀ ਵੇਣੂ ਵੀ ਵੇੜਾ ਸੱਜ ਵੀ ਵੇੜਾ ਅਜ ਵੀ ਵੇੜਾ ਜਿਵੇਂ ਵੜੇ ਉਹ ਡੀਗਰ ਦੇ ਬੋਚਰ ਨੋ ਗਿਆ ਐਵੇਂ ਉਹ ਉਸ ਵੇੜੇ ਜਦ ਕੋਈ ਸਿੱਟਾ ਮਾਉਣ ਲੱਗ ਜਾਂਦੇ ਨੇ ਫਿਰ ਕੁਦਰਤ ਗੱਲ ਆ ਪਰਮਾਸ਼ ਹੋ ਜਾਂਦੀ ਫਿਰ ਉਹ ਲ ਪਹਿਲਾਂ ਹੱਥੇਵਾ ਆਉਂਦਾ ਵੀ ਮੜ ਜਾਂਦਾ ਫੇਰ ਜਿਹੜਾ ਹੁੰਦਾ ਨਾ ਵੀ ਪਤਾ ਜਿੱਕਰੂ ਪੈ ਜਿੱਕਰੂ ਸਾਡੇ ਪਾਣੀ ਚ ਮੈਂ ਰਾਜਸਥਾਨ ਵਾਲੇ ਕਹਿੰਦੇ ਹਾਂ ਦੀ ਕੌੜਾ ਜਿੱਕਰੂ ਜਦ ਵੀ ਪਾਣੀ ਦਾ ਠੀਕ ਹੈ ਜਿੱਕਰੂ ਪਿਛਾਈ ਆ ਤੇਨ ਉਹਨਾਂ ਦਾ ਜਿਹੜਾ ਹੰਤਾ ਆਦਮੀ ਨੂੰ ਹੌਸਲਾ ਬਹੁਤ ਹੋ ਜਾਂਦਾ ਇਸ ਦਾ ਫੇਰ ਦਿੱਤ ਨਾ ਦਿੱਤ ਕੁਝ ਨਾ ਕੁਝ ਮਿਲਣੀ ਜਦ ਦਿੱਤ ਕੁਝ ਨਾ ਕੁਝ ਮਿਲੇਗਾ ਕਿਤੇ ਲਈ ਪੜਨਾ ਇੱਕ ਤਿਲ ਜਿੰਨੀ ਵੀ ਗੱਲ ਨਾ ਕੁਮਾਈ ਜਾਵੇ ਨਹੀਂ ਹੁੰਦੀ ਐਨਾ ਕੁਛ ਮੈਨੂੰ ਲੱਗ ਜਾਂਦਾ ਫਿਰ ਉਸ ਅਵਸਥਾ ਦੇ ਵਿੱਚ ਆਉਂਦਾ है। ਵੀ ਹੁਣ ਇਹ ਯਾਨੀ ਵਸਤੂ ਤਾਂ ਉਮਰਦੀ ਫਿਰ ਉਹ ਜੋ ਜੋ ਆਪ ਚਰਚਾ ਕਰਦਾ है, ਫਿਰ ਉਹਦਾ ਬਦਲਣ ਲੱਗ ਜਾਂਦਾ ਹੈ ਇੱਥੋਂ ਸ਼ੁਰੂ ਹੋ ਜਾ। ਤਾਂ ਇਹ ਕਹਿਣਾ ਹੈ ਕਿ ਖੋਜ ਤ ਖੋਜੇ ਤ ਤੱਤ ਵਿਚਾਰਿਓ। ਲਗਾਤਾਰ ਖੋਜ ਜੋ ਖੋਜੇ ਜੋ ਫੇਰ ਤੱਤ ਅਸਲ ਹੋਣੀ। ਇਹ ਹੀ ਹੁੰਦਾ ਹੁੰਦਾ। ਤੱਕ ਤੁਰ ਕੇ ਪਹੁੰਚਾਂਗੇ ਅਪਰ ਜਾਇ ਦੇਖਣ ਲੱਗਿਆ ਪਹਾੜ ਦੂਰ ਹੋਇਆ ਹੋਏਗਾ। ਪਰ ਵਿਚਾਲੇ ਜਿਹੜਾ ਫਾਸਲਾ ਉਹ ਤੈਅ ਕਰਨਾ ਹੀ ਪਊਗਾ। ਪਹਾੜ ਦਾ ਦੂਰੋਂ ਦੇ ਲੱਗ ਗਿਆ ਪਰ 10 ਕਿਲੋਮੀਟਰ ਤੋਂ ਉਹ ਫਾਦਲਾ ਤੱਕ ਅੱਜ ਨਹੀਂ ਪਹੁੰਚਦਾ ਹੈਗਾ ਜਿਗਰ ਨਾਲ ਥੋੜੀ ਗੱਲ ਬਣਦੀ ਉਹਤੇ ਪਹੁੰਚਣ ਨਾਲ ਗੱਲ ਬਣਦੀ ਪ੍ਰਭ ਕੋ ਸਿਮਰੇ ਸਹਿਤਰ ਬੰਤੇ ਪ੍ਰਭ ਕੋ ਸਿਮਰੇ ਸਹਿਤਰ ਬੰਤੇ ਜਿਹੜੇ ਸਿਮਰਦੇ ਨੇ ਪਹਿਲਾਂ ਤਾਂ ਉਹਨਾਂ ਕੋ ਨਾਮ ਤਾਂ ਹੈ ਦੇਈ ਸਿਮਰਿਆ ਨਹੀਂ ਜਾਂਦਾ ਸਿੰਤਾ ਉਹ ਤਾਂ ਉਹਨਾਂ ਦਾ ਗਿਆਨ ਵਾਲਾ ਹੈਗੇ ਨੇ ਬੰਦੇ ਪਹਿਲਾਂ ਹੀ ਗਿਆਨ ਵਾਲਦੇ ਸਿਪੜੋ ਤੇ ਗਾਂਧੀ ਗੱਲ ਲਾ ਫਿਰ ਉਹ ਸੰਤੋਖ ਤੱਕ ਗਏ ਹੋਏ ਨੇ ਸੰਤੋਖ ਹੀ ਰਹੇ ਹੋ ਨੇ ਜਿੱਤੇ ਸਰ ਬਾਹਰੀ ਬੁਖਰੀ ਉਤਰਨ ਤੱਕ ਆਉਂਦੀ ਜੰਮਰ ਕੋਈ ਹੋਈ ਯਾਨੀ ਕਿ ਜਿਹਦਾ ਹਾਂ ਸੇਤਨ ਬੰਦੇ ਕੁਟਨ ਵਾਂ ਤੇ ਜਿੱਦ ਤੱਕ ਹੁੜ ਵਰਤਨ ਜਿਦਾ ਹੈ ਬਸ ਸੁਪਰਸਾ ਪਰਸਰਾਉ ਆਇਆ ਕਹੇ ਤੇ ਇਨੋ ਇਸ ਕਰਕੇ ਉਹ ਕਹਿੰਦਾ ਨਾਨਕ ਜੀ ਦਾ ਦਾ ਦਾ ਦਾਸਤ ਇੱਜ਼ਤ ਦਿੱਤੀ ਹੈ ਉਹਨੂੰ ਕਰਕੇ ਰੱਬ ਸਿਮਰੇ ਸੇ ਪਤਵੰਤ ਹੁੰਦੇ ਕੋਈ ਪਤਵੰਤ ਵੀ ਜਿਦਾ ਵੀ ਕੁਝ ਪਤਵੰਤ ਹੁੰਦੇ ਨੇ ਕੋਤਨ ਹੁੰਦੇ ਹੁੰਦੇ ਪਤਵੰਤਾ ਦਾ ਅਬਦੁਲ ਕਲਾਮ ਸੀ इज्जत आदा है इज्जत का दिया तो गांधी देता है मतलब ख्याति ही है वोट भी दे चलो राष्ट्रपति तक बन गया इज्जत दी है लोग का है खुदता कुछ देता है करके खोजे है चलो लोगन जिन्होने इज्जत दी है ओना दे मतलब दा खोजिया भी है जिने इज्जत देने वाले ओना दे बस चीज थी ਸਾਡੇ ਮਨ ਦਿਆ ਜਾ ਜਾ ਇਸ ਕਰਕੇ ਪਤਵੰਤਾ ਤਨ ਬੁੱਧ ਤੇ ਪਤਵੰਤੇ ਜਵਰ ਕਰ ਪਤਵੰਤਾ ਗਿਆਨ ਤੇ ਲੈਵੋ ਤੇ ਪਤਵੰਤਾ ਗਿਆ ਉਹਦੀ ਬੁੱਧ ਜਿਹੜੀ ਬੁੱਧ ਹੈ ਉਹਦੀ ਉਹ ਚਤਨਾ ਜੁੜੀ ਹੋਈ ਹੈ ਖੋਜੀ ਹੈ ਪਤਵੰਤਾ ਖੋਜੀ ਰੁਕਿਆ ਨਹੀਂ ਪਤੀ ਵਾਲੀ ਬੁੱਧ ਉਹਦੀ ਮੰਨਣਾ ਨਹੀਂ ਨਹੀਂ ਹੈ ਹਾਂ ਉਹ ਤੇ ਆਪਾਂ ਨੂੰ ਮਾਰ ਦੇ ਮਨ ਖੋਗੋ ਦਰ ਠੀਕੇ ਨਹੀਂ ਸੰਦਾ ਉਹ ਕਿੱਥੇ ਕਾ ਲੋ ਵਾਇਰੀ ਗੋਦੀਪੀ ਕਰ ਸਕਦਾ ਹਾਂ ਹਾਂ ਮਨਪਸੰਦ ਬਹੁਤ ਹੋਦਾ ਉਹ ਵੀ ਕਾਗਰਦਾ ਜਾਈਏ ਸੰਸਾਰ ਉੱਥੇ ਕਾਗਰਦਾ ਜਾਈਏ ਸੰਸਾਰ ਨੂੰ ਤਿਆਰ ਜਾਈ ਉੱਥੇ ਹੀ ਬਹੁਤ ਬੇਚਤੀ ਅੰਦਲੇ ਚੇਤਨਾ ਜੋੜੀ ਹੋਈ ਰਾਮ ਨਾਲ ਜੁੜੀ ਹੋਈ ਹੈ ਸੀਤਾ ਅਸ਼ੁੱਧ ਭਤਾਰ ਛੋੜਿਆ ਨਹੀਂ ਹੋਇਆ ਹਾਂ ਅਸ਼ੁੱਧ ਭਤਾਰ ਛੋੜਿਆ ਨਹੀਂ ਹੋਇਆ ਇਹ ਪਤਵੰਤਾ ਲੱਗ ਇਹ ਲਫਜ਼ਾਂ ਦੇ ਉੱਤੇ ਹੁਣ ਜਿਆਦਾ ਕਿਦਦਰ ਹੋਣਾ ਪੈਣਾ ਦਾ ਪਤਾ ਲੱਗਣਾਗਾ ਕੱਲੇ ਕੱਲੇ ਸ਼ਬਦੀ ਵਿਆਖਿਆ ਤੋਂ ਕਾਹਨ ਦੱਸਣ ਦਾ ਕਾਰਨ ਦੱਸਿਆ ਹੁਣ ਸਨ ਸੱਤ ਤੇ ਲੋਕ ਉਹਨਾਂ ਲੋਕਾਂ ਦੀ ਇੱਜ਼ਤ ਕਰਦੇ ਨੇ ਜਿਹੜੇ ਧਨਵੰਦ ਤੇ ਨੇ ਇਸ ਕਰਕੇ ਇੱਥੇ ਕਿਉਂ ਆ ਸੀ ਅਸੀਂ ਆਪਣੇ ਜਿਹੜੇ ਸਾਡੇ ਕੈਟਾਗਰੀ ਦੇ ਆਦਮੀ ਦੇ ਸਾਡੇ ਦੇਸ਼ ਦੇ ਨੇ ਅਸੀਂ ਉਹਨਾਂ ਦੀ ਜਿੱਦ ਦਿੱਤੀ ਹੈ ਕਿ ਲੋਕ ਆਪਣੇ ਦੇਸ਼ ਦੀ ਮੰਨਾਂ ਨੇ ਉਹਨਾਂ ਨੂੰ ਉੱਤਰ ਮਾਰੀਏ ਲੈ ਇੱਧਰ ਮਾਰੀਏ ਨੇ ਇੱਧਰ ਇਹ ਦੁਨੀਆ ਦੀ ਜਿੰਦਗੀ ਇੱਜ਼ਤ ਹੈ ਉਹ ਦੁਨੀਆ ਦੀ ਜਿੰਦਗੀ ਇੱਜ਼ਤ ਹੈ ਇਹ ਭਗਤਾਂ ਦੀ ਦੁਨੀਆ ਦੀ ਇੱਜ਼ਤ ਹੈ ਜੇ ਉਹ ਸਾਡੀ ਦੀ ਕਰਦੇ ਅਸੀਂ ਉਹਨਾਂ ਦੇ ਵੀ ਨਹੀਂ ਕਰਦੇ ਇਹ ਲੋਪੜ ਬਾਬਾ ਵੀ ਲੋਪੜ ਹੁੰਦੇ ਇੱਜਾ ਸਮਝਾ ਬਾਬਾ ਜੀ ਨੂੰ ਸਮਝਦਾ ਬਾਬਾ ਜੀ ਵੀ ਨਹੀਂ ਲੋਪੜ ਕੁਝ ਠੀਕ ਹੈ ਜੀ ਲੋਪੜ ਹੋ ਆਪੜ ਵੀ ਲੈਣ ਨੂੰ ਗੋੜਾ ਸੇ ਹੋ ਜੀ ਪ੍ਰਭੂ ਕੋ ਸਿੰਘਰੇ ਸੇ ਜਨਪੁਰ ਰਾਪੋਏ ਸਿਵਨੈ ਸੇ ਜਾਂਦਾ ਦਰਗਾਹ ਪ੍ਰਵਾਨ ਨੇ ਇਹ ਦਰਗਾਹ ਪ੍ਰਵਾਨ ਉਹਦੀ ਇੱਜ਼ਤ ਨਾ ਕਰੀਏ ਅਸੀਂ ਅਸੀਂ ਦੱਸਾਂ ਹੈ ਇਹ ਸਿਵਨ ਵਾਲਾ ਇਹ ਹੁਣ ਇਹ ਸਿਵਨ ਵਾਲਾ ਜੇ ਤਾਂ ਜਨੂਪਦਾਰਤ ਨੂੰ ਮਿਲ ਗਿਆ ਇਹ ਸਮਰਦਾ ਜਨੂਪਦਾਰਤ ਵਾਸਤੇ ਜ਼ਹ ਇਹਦਾ ਜਨਪਦਾਰ ਪ੍ਰਵਾਨ ਦਾ ਹੋ ਗਿਆ ਇਹ ਜਨਪਦਾਰ ਹੈ ਇਹਦਾ ਸਬੰਧ ਪ੍ਰਵਾਨ ਹੋ ਚੁੱਕਿਆ ਪ੍ਰਵਾਨ ਹੋ ਚੁੱਕਿਆ ਭਈ ਇਹ ਤਾਂ ਕਰ ਲਈ ਐ ਲੱਭੀ ਰਹਿਦੀ ਐ ਇਹ ਵੀ ਦਿੱਕੀ ਹੈ ਉਹਦੇ ਕੋਲ ਠੀਕ ਤਾਂ ਹੀ ਐ ਲੱਭੀ ਕਰੂਗਾ ਦਾਖਲਾ ਆਹੋ ਆਹ ਉੱਪਰ ਉਪਰਲੀ ਕਲਾਸ ਦੀ ਐਡਮਿਸ਼ਨ ਥੱਲੇ ਉਹਨਾਂ ਕਰ ਲਿਆ ਸਾਰੀ ਕਰ ਪ੍ਰਭੂ ਕੋ ਸਿਮਰੇ ਸੇ ਜਨ ਪਰਵਾਨ ਪ੍ਰਭੂ ਕੋ ਸਿਮਰੇ ਸੇ ਜਨ ਪਰਵਾਨ ਜਿਹੜੇ ਨੇ ਜਨ ਦੇਖੋ ਲਬ ਜਲਬ ਬਸੇ ਥੇ ਚੰਗ ਤੇ ਵੱਡੀ ਪਦਵੀ ਨਹੀਂ ਆਦਮੀ ਵਾਸਤੇ ਕੋਈ ਜਨਾ ਮੰਨ ਲੋ ਗਿਆਨੀ ਜਾਣਕਾਰ ਜਾਣਕਾਰੀ ਰੱਖਣ ਵਾਲਾ ਆਤਮ ਗਿਆਨੀ ਨੂੰ ਜਨ ਚਾਹੁੰਦੇ ਨੇ ਜਦੋਂ ਆਪਣਾ ਰੂਪ ਦਾ ਗਿਆਨ ਆਤਮ ਗਿਆਨ ਹੋ ਗਿਆ ਉਹ ਜਦੋਂ ਜੰਤੋਂ ਜਨਕਲਬਦ ਬਣਿਆ ਹੋਇਆ ਜਦੋਂ ਉਹ ਜਨਸਰਾਜ ਆ ਬਣਿਆ ਨਾ ਭਗਤ ਉਸ ਜਨ ਤੇ ਇਸ ਰੂਪ ਲੈ ਲਿਆ ਚੱਲਣ ਵਾਲਾ ਜਨਕਲਿਆ ਨਾ ਦਰਹਿਤ ਸਾਡੇ ਕੋ ਸੋਈ ਜਾਂ ਜਨ ਸੋਈ ਜਾਂ ਜਾਣ ਜੋ ਜਿਹੜੇ ਜਨ ਕਹਿਆ ਜਾਂ ਨਾ ਪ੍ਰਭ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਪੁਰਖ ਪ੍ਰਧਾਨ ਪੁਰਖ ਪ੍ਰਧਾਨ ਤੇ ਪ੍ਰਧਾਨ ਨੂੰ ਵੀ ਬਈ ਇਜਤ ਕਰਨੀ ਚਾਹੀਦੀ ਹੈ ਸਰਗਾਇ ਪ੍ਰਵਾਨ ਉਹਦੀ ਵੀ ਇਜਤ ਕਰਨੀ ਚਾਹੀਦੀ ਹੈ ਜੇ ਪ੍ਰਧਾਨ ਹੈ ਪ੍ਰਧਾਨ ਲਗੂ ਬਈ ਉੱਥੇ ਦੀ ਪ੍ਰਧਾਨ ਹੈ ਇੱਥੇ ਪ੍ਰਧਾਨ ਤੇ ਦੀ ਪ੍ਰਵਾਨ ਉਹ ਤੇ ਪ੍ਰਧਾਨ ਕਹਿੰਦਾ ਉਹ ਨੂੰ ਉਹਦੇ ਬਰਾਬਰ ਨਹੀਂ ਸਾਡੇ ਪੰਜਵੇਂ ਉੱਤੇ ਉਹਦੇ ਨੇ ਉਹ ਉਹ ਆਪਸ ਬਰਾਬਰ ਹੋਣ ਕੋਈ ਇੱਥੇ ਪ੍ਰਧਾਨ ਉਹ ਆਪਸ ਬਰਾਬਰ ਹੋਣਾ ਕੋਈ ਉੱਥੇ 200 ਨੇ ਹੈ ਜੀ ਉਹਦਾ ਹੈ ਨਹੀਂ ਕਿਹੜਾ ਕਲੀ ਆਉਂਦੇ ਪ੍ਰਧਾਨ ਨੂੰ ਸਵੇਰੇ ਸੇ ਬੇਬੁਤਾ ਜੀ ਕਹਿੰਦੇ ਉਹਦੇ ਇੱਜ਼ਤ ਵੀ ਕਬੂਲ ਕਰਦੇ ਮੋਤਾ ਜੀ ਕਿਹਦੇ ਨੇ ਡਿਪੈਂਡੈਂਟ ਨਹੀਂ ਹੈ ਕਿਸੇ ਤੇ ਹੋ ਨਾ ਕਿਸੇ ਰਾਜੇ ਤੇ ਨਾ ਕਿਸੇ ਹੋਰ ਤੇ ਬੋਤ ਤੇ ਪਰਵਾਸ ਤੇ ਕੁਝ ਐਸਾ ਨਹੀਂ ਹੋ ਸਕਦਾ ਜੋ ਉਹ ਜਿਹੜਾ ਹੁਕਮ ਮਾਤਾ ਉਹਦੇ ਸੱਤੇ ਕਬੂਦ ਹੋਵੇ ਉਹ ਦੋ ਦਿਨ ਬਗਲੇ ਹੋਣਗੇ ਦੋ ਨਹੀਂ ਜਿੰਨਾ ਚਾਹ ਪਤਾ ਵੀ ਹੁਕਮ ਜੇ ਨਾਲ ਸਭ ਕੁਝ ਮੰਨਦਾ ਹੈ ਮਥਾਜ ਮਥਾਜ ਕਿਹਾ ਫਿਰ ਉਹ ਕਿਸੇ ਦੀ ਚਾਪ ਨੂੰ ਰਹਿਣੇ ਨੇ ਮਥਾਜ ਉਹ ਚਾਪ ਨੂੰ ਕਰਦੇ ਇਸੇ ਦੀ ਵੀ ਜਦੋਂ ਜੀ ਕਰਨੀ ਪੈ ਸੀ ਜੇ ਕੋਈ ਕਾਜਵੇ ਬੜੇ ਗੁਰਮਖਰੇ ਆ ਕੇ ਆਪਾਂ ਕਹੇ ਉਹ ਬਹੁਤ ਬਹੁਤ ਅੱਪਾ ਗਏ ਬੜੇ ਗੁਰਮਖਰੇ ਗੁਰਮ ਕੋ ਵੇਣਉਣ ਕਰਨੇ ਕਹਿੰਦੇ ਕਹਿ ਦਿਆ ਹੈ ਕਿ ਇਹ ਸ਼ਾਂਤੀ ਜੀ ਹੈ ਨਾ ਇਹ ਉਹ ਉਹ ਆਪਣੇ ਸੁਚਾਉ ਗੁਰਦਵਾਰਿਆਲ ਕਿਸਨਗਰ ਉਤਰਨ ਵਿੱਚ ਖੜੀ ਅਸਰਨ ਵਿੱਚ ਖੜੀ ਚਿੱਤਰ ਅਡੂ ਵਿੱਚ ਵੇਣੋ ਕਹਨ ਵੀ ਤੁਸੀਂ ਕਹਿ ਦੋਏ ये को मरम मैं तारा गुरुवर बोलते से काला प्रभु को सिमरें शेर बेहमताजे सर्व के लागे ਸਭ ਕੋ ਸੁਣਨ ਦੇ ਸਰਬ ਕੇ ਰਾਜੇ ਭਾਈ ਸਰਬ ਕਾਰਾ ਜਾਵਾ ਉਹ ਉਹਨਾਂ ਕੇ ਮਹਿਨਤ ਕਰੀ ਸਰਬ ਕੇ ਰਾਜੇ ਨੇ ਤਾਂ ਕੋ ਲਫਜ਼ ਵੀ ਏਡੇ ਏਡੇ ਉੱਥੇ ਸਿੱਧ ਦਿੱਤੇ ਲਿਆ ਕੇ ਪਹਿਲਾਂ ਕਾਇਦ ਉਹ ਦੱਸਦਾ ਦਸਨਾ ਤਾਂ ਸਾਥਾਂ ਦਸਨਾ ਕਿਉਂਕਿ ਉਹ ਸਾਰੇ ਵੱਡੇ ਵੱਡੇ ਪਾੜ ਉੱਥੇ ਤੇ ਹੀ ਕਰਦੇ ਜਿਹੜੇ ਪ੍ਰੋਬਲਮ ਸਦਨ ਹੈ ਬੇਮਤਾ ਮਤਾਜੇ ਕੀ ਕਹਦੇ ਹੋ ਤੁਸੀਂ ਬਿਨਾ ਪ੍ਰਾਪਤੇ ਕਿਸੇ ਦੇ ਮਤਾਜੇ ਨਹੀਂ ਰੱਬ ਦੇ ਤੋਂ ਮਤਾਜਾ ਹੋ ਸਕਦੇ ਨੇ ਬੇ ਮਤਾਜੇ ਰੱਬ ਕੋ ਝਮਨੇ ਤੋਂ ਸਰਬਕੇ ਰਾਜੇ ਹਮ ਰਹੇ ਕਿ ਸਭ ਰਾਜਾ ਹਾਂ ਪ੍ਰਭੂ ਕੋ ਸਿਮਰੇ ਸੇ ਸੁਖਵਾਸੀ ਪ੍ਰਭੂ ਕੋ ਝਮਨੇ ਸੇ ਸੁਖਵਾਸੀ ਜੇ ਜੀ ਦੁੱਖ ਹੋਵੇ ਤਾਂ ਵੀ ਕਿਸੇ ਦਾ ਮਤਾਜ ਹੋਵੇ ਹੋ ਕਿ ਜੇ ਚੀਤੋਂ ਦੁਖਤਾਈਆਂ ਕਿਸੇ ਜੀਤੋਂ ਮਤਾਜ ਤਾਂ ਉਹ ਸੁਖਵਾਸੀ ਨੂੰ ਮਤਾਜ ਹੀ ਤਾਂ ਨਹੀਂ ਸੁਖਵਾਸੀ ਹੈ ਦੁੱਖ ਵਾਲਾ ਕੋਈ ਕਹਦੇ ਕਹਦੇ ਕੋਈ ਵੀ ਜਦ ਤੱਕ ਸੁਖ ਸੁਖਦੇ ਨਹੀਂ ਉਹ ਸਿਮਰਨ ਤੱਕ ਚੱਲੀ ਜਾ ਮਾਰਕਟ ਸਾਰੇ ਆ ਪ੍ਰਾਪਤੀਆਂ ਨਹੀਂ ਹੋ ਰਹੀਆਂ ਨਹੀਂ ਹੋ ਰਹੀਆਂ ਜਿੰਨਾ ਰਹਿ ਰਹੇ ਹੋ ਭਾਈ ਜਪ ਨਾਲ ਪ੍ਰਾਪਤੀ ਆਉਣੀ ਆ ਗੱਲ ਹੈ ਉਹ ਤਾਂ ਪਹਿਲਾਂ ਹੀ ਆ ਗਿਆ ਜਪੇ ਤੋਂ ਦੂਸਰੋਂ ਬੰਦੇ ਨੇ ਉਹ ਤਾਂ ਜਪੇ ਦੀ ਗੱਲ ਹੈ ਜਪਣ ਸਵਨ ਨਿਕਲ ਸਨ ਇੱਕੋ ਦਾ ਸਤ ਜਪਰ ਸਿੰਦਰ ਕੋਲ ਜੋ ਤੀਉ ਵੀ ਮਾਇਆ ਵਾਲੀ ਸਮਝਦੇ ਨੇ ਉਹ ਤਾਂ ਵੀ ਛੱਡੋ ਤੁਸੀਂ ਆਹ ਤਾਂ ਸਭ ਪਾਸੇ ਦਾ ਉਹ ਕਰਦਾ ਉਹ ਬਾਤਾਂ ਫਿਰ ਜਿਹੜੇ ਦਿਨ ਬਣਾਉਂਦੇ ਨੇ ਉਹ ਸ਼ਰੀਰ ਵਾਲੇ ਨੂੰ ਨਾ ਸਿਮਨ ਦਾ ਸ਼ੀਮੇ ਤੋਂ ਆਦਮੀ ਦਾ ਹੀ ਸਬੂਟ ਚੱਲਦਾ ਹੈ ਜਿਹੜਾ ਸਰੁਕਾ ਰਾਜਾ ਹੈ ਉਹ ਹੀ ਕਰ ਸਕਦਾ ਦੂਆ ਸਭ ਕਰੇ ਨਹੀਂ ਸਕਦਾ ਅੱਗੇ ਅੱਗੇ ਦੇਖੀ ਜਿਓਗਾ ਜ਼ਰੂਰ ਤੇ ਲਾਦੇ ਜਨ ਆਪ ਦੇ ਅੱਲਾਹ ਰਬ ਕੇ ਸੁਭਰੋ ਯੋਜਿਦਾ ਪੂਰਾ ਰਬ ਕੋ ਸਿਵਰੇ ਜਿਸ ਸੁਖ ਦੇ ਸੈ ਨਹੀਂ ਹੁਕਮ ਨਾਲ ਲੱਗਿਆ ਹੋਇਆ ਹੁਕਮ ਉਹ ਇਹਦਾ ਹੁਕਮ ਨਹੀਂ ਹੈ ਆਹੋ ਉਹ ਵੀ ਹੁਕਮ ਨਾਲ ਲੱਗਿਆ ਹੋਇਆ ਹਾਂ ਉਹਨਾ ਜੋ ਕੁਝ ਕਰਨਾ ਭਾਈ ਕੋਈ ਜ਼ਰੂਰੀ ਨਹੀਂ ਸਾਰਿਆਂ ਨੂੰ ਗੁਰਬਾਣੀ ਲਿਖਣ ਵਾਸਤੇ ਹੋਇਆ ਸੀ ਉਹ ਕਦ ਹੋ ਚੁੱਕਿਆ ਪਹਿਲਾਂ ਉਹ ਤਾਂ ਲਾਗੂ ਕਰ ਦੀ ਰਚਨਾ ਹੀ ਦੁਬਾਰਾ ਆ ਨਾ ਸੀ ਉਹ ਤਾਂ ਰਿਕਾਰਡ ਸਾਡੇ ਕੋਲ ਇਹ ਨਾ ਹੁੰਦਾ ਤਾਂ ਜੀ ਸਮਝ ਕਿਵੇਂ ਆਉਂਦੀ ਹਾਂ ਹੂੰ ਸਭੇ ਆ ਦੇ ਜਵਾਨੀ ਇਹ ਤੇ ਵੀ ਸਮਝਾ ਦੇਣੀ ਹੈ ਜਿਹੜੇ ਸਮਝੇ ਹੋਏ ਨੇ ਹੂੰ ਉਹਦਾ ਇੱਕ ਪੌਲੀਜੀਕਲ ਜਿਹਾ ਨਾ ਦੂਰ ਹੈ ਕੋਈ ਜਿਹੜਾ ਸਮਝਿਆ ਹੋਇਆ ਆ ਪਕੜਾ ਦੁਨੀਆਂ ਸਭ ਨੂੰ ਸਮਝਾ ਦੇਣ ਬੋਲ ਰਿਹਾ ਜਿਹੜਾ ਕਾਹਦੇ ਦਾ ਸਮਝਿਆ ਹੋਇਆ ਪਰ ਜਿਹੜਾ ਆਇਆ ਉਹਨੂੰ ਕੋਈ ਨਹੀਂ ਸਮਝਾ ਰਿਹਾ ਗੱਲ ਕੀ ਹੈ ਉਹਨੂੰ ਤੇ ਸਮਝਾ ਰਿਹਾ ਥੋੜੇ ਨੂੰ ਥੋੜੀ ਘਾਟ ਆ ਜੀ ਸਮਝ ਵਿੱਚ ਹੁਣ ਸੁਖੇ ਖੁਲਾਸੇ ਦਾ ਹੀ ਤਰੀਕਾ ਹੋ ਰਿਹਾ ਵਾਸੇ ਦਾ ਤਰੀਕਾ ਬਲੋ ਲਜੰਦਾ ਰੋ ਇਹੀ ਤਰੀਕਾ ਠੀਕ ਹੈ ਵਾਸੇ ਥੋੜਾ ਉਹ ਵਿਖਲਾਸਾ ਪਰਹਿ ਜਾ ਹੋਵੇ ਕੋਈ ਕਿਸੇ ਪਾਸੇ ਭੁਖਰਾ ਰਹੇ ਕਿਉਂਕਿ ਆਪਾਂ ਕਰਦੇ ਕਿ ਉਹ ਪੁਣ ਨਹੀਂ ਹੋ ਜਣਾ ਬਾਕੀ ਭੁਖਰਾ ਰਹੇ ਹੈ ਨਾ ਪਿੱਛੇ ਪਰਛੀ ਬੰਧਿਆ ਕੋਏ ਪਿੱਜਰੀ ਪਰਛੀ ਬੰਧਿਆ ਕੋਏ ਛੇਰੀ ਪਰ ਵੀ ਮੁਕਤ ਨ ਪੈਨਾਕੋ ਤਿੰਤ ਵਿਜਰਾ ਸੀ ਉਹਦੇ ਵਿੱਚ ਬੰਤ ਹੈ ਪਗਿਆਂ ਦੀ ਆਲ ਉਹ ਇਹ ਜਿਹੜਾ ਜਿਹੜਾ ਜਿਹੜਾ ਜਲਾ ਸਰਾਖ ਹੋ ਜਾਂਦਾ ਜਿਵੇਂ ਜਿਵੇਂ ਆਪਾਂ ਨੂੰ ਅਲਗਲੀ ਹੋਦੀ ਹੈ ਜਿਹੜੇ ਜਿਹੜੇ ਸ਼ੱਕੇ ਦੂਰ ਹੁੰਦੇ ਨੇ ਉਹ ਇਹ ਜਿਹਾ ਸਰਾਖ ਹੋ ਜਾਂਦੇ ਨੇ ਉਹ ਜੀ ਰੋਸ਼ਨੀ ਆ ਜਾਂਦੀ ਹੈ ਬਾਦੂ ਕਈ ਵਾਰ ਸਰਾਖ ਦੇ ਵਿੱਚ ਤਿੰਚਾ ਇਹ ਜਾ ਹੋ ਜਾਂਦਾ ਕਿ ਤਿੰਨ ਚਾਰ ਸਰਾਖ ਇਕੱਠੇ ਹੋ ਜਾਂਦੇ ਨੇ ਐਡਾ ਬੜਾ ਪਰਮ ਟਿਕੜ ਜਾਂਦਾ ਚਾਰ ਪੰਜ ਛੇ ਕਠੇ ਸਰਾਕ ਬਟਾ ਬਟਾ ਸਾਰਾ ਹੋ ਜਾਂਦਾ ਜੇ ਵੱਡੀ ਗੱਲ ਸਮਝ ਆਉਂਦੀ ਸਰਾਕ ਉਹੀ ਵੱਡਾ ਹੋ ਜਾਣਾ ਹੈ ਛੋਟੇ ਛੋਟੇ ਸਰਾਕ ਉਹਦੇ ਵਿੱਚ ਆ ਜਾਣ ਐ ਹੋਏ ਹੋਏ ਨੇ ਪਹਿਲਾਂ ਛੋਟੇ ਛੋਟੇ ਸਰਾਕ ਹੋਏ ਫਿਰ ਉਹ ਤੋਂ ਵੱਡੇ ਹੋਏ ਇੱਕ ਤਾਂ ਇਹ ਤਰੀਕਾ ਇੱਕ ਪਹਿਲਾਂ ਹੀ ਵੱਡਾ ਸਰਾਕ ਕਰ ਦਵੇ ਦੂਜਿਆਂ ਦੀ ਮਸਾਲਾ ਦੇ ਕੋ ਜਿਹੜੇ ਪਹਿਲੇ ਹੋਣ ਉਹਨਾਂ ਦੀ ਜਿਵੇਂ ਆਪਾਂ ਹੁਣ ਕਰਦੇ ਹਾਂ ਉਹਨਾਂ ਦੀਆਂ ਨਾਲ ਮਸਾਲਾ ਦੇ ਉਹ ਕਹਿੰਦੇ ਪਿੰਜਰ ਪੰਛੀ ਬੰਦਿਆ ਕੋਏ ਪਰ ਜਿੱਦਾਂ ਕਿ ਸਰਾਖ ਨੇ ਸਰਾਖਾ ਦੇ ਵਿੱਚ ਕੋਈ ਨਹੀਂ ਬਣਦੀ ਹੈ ਕੱਲੇ ਬਾਹਰੋਂ ਵੀ ਨੀਦਾ ਜਿੱਥੇ ਦਾ ਬਾਹਰ ਨਹੀਂ ਆਦਾ ਜਿੱਥੇ ਦਾ ਬਾਹਰ ਬਾਹਰ ਤਾਂ ਜਿੱਥੇ ਦਾ ਉਤਲਾ ਇਸਾ ਉੱਡ ਜਾਣਾ ਚਾਹੀਦਾ ਇਹ ਇਦਾਂ ਵਾਦ ਉਹਦਾ ਕੱਟ ਦੇਣਾ ਚਾਹੀਦਾ ਸਾਡੂ ਜਿਹਦੇ ਨਾਲ ਪਰਸੀ ਰਹਿੰਦੇ ਬਾਹਰ ਨੂੰ ਆਪੂ ਤੋਂ ਨਬਰ ਫਮਾ ਨਾ ਕਰ ਬਰੋਸਾ ਉਹ ਛੇੜੀ ਪਰ ਮਿਆੜੀ ਗੱਲ ਹੈ ਜਿੰਦੀ ਆ ਉਹ ਅੱਖਾਂ ਨਾਲ ਨਹੀਂ ਉਹ ਛੇੜੀ ਸਿਮਰਨਾ ਜਾਂਦਾ ਹੋਗਾ ਕੋਰ ਕੋ ਸਿਮਰੇ ਸੇਸ ਉਪਵਾਸੀ ਸਭ ਕੋ ਸਿਮਰੇ ਸੇਸ ਉਪਵਾਸੇ ਸੁੱਖ ਦੇ ਵਿੱਚ ਸੁੱਖ ਸਾਗਰ ਜਿਹਨਾਂ ਦਾ ਅਸਰ ਹੈ ਅਸਲ ਦੇ ਵਿੱਚ ਸੁੱਖ ਸਰਬੱਤੇ ਦਾ ਵਾਸ ਹੋਣਾ ਜਦੋਂ ਸਮਾਂ ਚਾਹਦਾ ਤਾਂ ਸੁੱਖ ਸਾਧਾ ਚ ਰਹਿਣ ਸਿਮਰ ਚੱਲਦਾ ਹੀ ਹੁੰਦਾ ਪਹਿਲਾਂ ਜਪੇ ਹੁੰਦੇ ਚੱਲਦਾ ਹੁੰਦਾ ਜਪ ਕਰਦੇ ਚੱਲਦਾ ਹੁੰਦਾ RAMANAND ਨਾਮ ਜਪ ਪਰ ਫਿਰ ਜਪ ਬਾਹਰ ਨੂੰ ਚੱਲਦੀ ਜਬ ਇੱਕ ਤਾਂ ਆਪਣਾ ਬੋੜ ਉਹ ਬਾਹਰ ਚੱਤੀ ਜਾ ਇੱਕ ਪੁਰੋਂ ਤੋਂ ਘਟਿਆ ਹੋਇਆ ਜੇ ਚੱਕੀ ਚਲਾਉਣੀ ਹੈ ਉਹ ਚੱਕ ਕੇ ਪੜੋ ਉੱਥੇ ਹੀ ਲੈਣਾ ਪਊ ਜਿੱਥੇ ਕੱਢਿਆ ਹੋਇਆ ਹੈ। ਕਰ ਲੈ। ਹਾਂ ਇਹ ਨਹੀਂ ਉੱਥੇ ਜਾਣਾ ਉਹੀ ਫਿਰ ਕੀਤਾ ਆਇਆ ਆਪਣਾ। ਉਹ ਚੱਕ ਕੇ ਉੱਥੇ ਲੈ ਆਉਂਦਾ। ਉੱਥੇ ਵੀ ਫੈਬ੍ਰਿਕ ਕੰਨਾਟਾ ਇਸਤਾਨਾ ਤੇ। ਗੁਰੂ ਚੱਕੀ ਜੋੜ ਕੇ ਹਾਂ ਜੀ ਸੁਣਨ ਦਾ ਹਾਂ ਯਾ ਪਿੱਛੇ ਫਰੀਕੇ ਹੈ ਬਹਿਣੀ ਕਰਕੇ ਕਾਲੇ ਆਫਿਸ ਆਇ ਉੱਥੇ ਨਹੀਂ ਕੀਤਾ ਹੈ ਹਾਂ ਜੀ ਕੋ ਸਿਮਰੇ ਸਦਾ ਬਨਸੀ ਪ੍ਰਭ ਜਿੰਨੇ ਸਦਾ ਬਨਸੀ ਉਹ ਲਗਾਤਾਰ ਚੱਤੀ ਚਲਦੀ ਹੈ ਜਦ ਜਦ ਜਪ ਜਪਦਾ ਕੰਟੀਨਿਊ ਹੋ ਜਾਂਦਾ ਲਗਾਤਾਰ ਬਹੁਤਾ ਜਲ ਬਹੁਤਾ ਜਲ ਜਦ ਮਤਲਬ ਜਪ ਹੋ ਜਾਂਦਾ ਉਹ ਜ਼ਿੰਦਗ ਬਣ ਜਾਂਦਾ ਪਹਿਲਾਂ ਦਾ ਜਪਾ ਕੋਥੀ ਦਰ ਠੀਕ ਹੈ ਪਾਣੀ ਪੜਦੇ ਪੜਦੇ ਆ ਪੜਦੇ ਪਹਿਲਾਂ ਪੜਦਾ ਹੀ ਨਹੀਂ ਸਾਰੀ ਪੜਦੇ ਫਿਰ ਬਿਨਾ ਕੋਥੀ ਤੋਂ ਚੱਲ ਪੈਂਦੀ ਹੈ ਪਾਣੀ ਕਦੇ ਯਾਦ ਹੋ ਜਾਂਦੀ ਹੈ ਦੇਵੀ ਫਰਜ਼ ਤਾਮੀਅਤਰ ਬਾਣੀ ਚੱਲਦੀ ਰਹਦੀ ਹੈ ਫਿਰ ਉਹਦੀ ਵਿਚਾਰ ਚੱਲਦੀ ਰਹਦੀ ਹੈ ਪਹਿਲਾਂ ਬਾਣੀ ਚੱਲੇ ਫਿਰ ਵਿਚਾਰ ਚੱਲੇ ਜਦ ਵਿਚਾਰ ਚੱਲਦੀ ਹੈ ਫਿਰ ਜਾਪ ਆ ਵਿਚਾਰ ਚੱਲਦੀ ਹੈ ਪਹਿਲਾਂ ਤਾਂ ਪੜਨਾ ਹੀ ਹੈ ਨਾ ਪੜਨਾ ਕੋਡੋ ਕੋਡਣਾ ਜੀਵਨ ਦਾ ਕੋਡਣਾ ਹੁੰਦਾ ਯਾਦ ਕਰ ਲੈਣ ਦਾ ਹੱਥ ਨਾਲ ਬਾਣੀ ਨੂੰ ਘੰਟੇ ਵੀ ਕੋਡਦੇ ਨੇ ਪਹਿਲਾਂ ਕੋਚੇ ਤੋਂ ਪਾਣੀ ਪਾਣੀ ਹੈ ਫੇਰੇ ਸਿਵਣ ਬਣ ਜੁਦਾ ਖੋਜ ਦਾ ਨੂਰ ਬਣਦਾ ਓਖਿਓ ਖੋਜੀ ਜਦ ਇਹ ਮੈਂ ਉਹ ਬਲਜੀਤ ਹੈ ਉਹ ਚੱਲ ਪਰਸੋਂ ਦਾ ਲੱਗਿਆ ਹੋਇਆ ਉਹ ਫਰੀਦਿਓ ਫਰੀਦੈ ਜੋਗਨ ਗਲੀਆਂ ਜਿੱਕਰ ਦੂਰ ਦਾ ਉਹ ਐਸਾ ਗਲੀਆਂ ਜਿੱਕਰ ਦਾ ਤਾਂ ਇਹ ਅਬੀੜੀਆਂ ਆ ਅੱਲਾਹ ਵਰ ਸਭ ਨੇ ਅੱਲਾ ਦੇ ਮੀਨ ਦਾ ਜਿਹੜਾ ਗੜੀਆਂ ਚ ਬਾਤ ਸੋਰੀਆ ਉਹਨਾਂ ਵਾਸਤੇ ਚੱਕੜਾ ਕਲ ਕਾਣਾ ਉਹ ਜਿਹੜੇ ਰੋਜ਼ ਪ੍ਰਚਾਰ ਕਰਦੇ ਨੇ ਸੰਤੋਰਾ ਵਾਸਤੇ ਚੱਕੜਾ ਹੁੰਦੀ ਉਹ ਬਾਣ ਕਰਦੇ ਅਰੇ ਇਹਨਾਂ ਨਾਲ ਆਪਣਾ ਗੜੀਆਂ ਚੱਕੜਾ ਵੀ ਪੈਂਦਾ ਯਾਨੀ ਸਾਰੇ ਗੱਲਾਂ ਕਰਦੇ ਨੇ ਸਤਿਦਾ ਕਹਿੰਦੇ ਗੱਲਦਾ ਹੈ ਕੋਣ ਉਹਦਾ ਚੱਕੜ ਦੇ ਕਪੜੇ ਨੇ ਛੱਡੇ ਕੋਣ ਆਪਣਾ ਦੂਰ ਘਰ ਉਹਨਾਂ ਦੇ ਪਹੁੰਚ ਤੋਂ ਦੂਰ ਹੈ ਘਰ ਕਿੱਥੇ ਜਾਣੂ ਉਹ ਪਹਾੜੋ ਵੀ ਨਹੀਂ ਆਏ ਕਾਰਨ ਦੱਬੂ ਨਾਲ ਪਿਆਰੇ ਦਿਓ ਉਹ ਪਿਆਰੇ ਦਿਓ ਤਾਂ ਕਹਿਣੇ ਨੇ ਸੰਤ ਬਣੇ ਹੋਏ ਨੇ ਤੇ ਕਹਿ ਨਹੀਂ ਸਕਦੇ ਨਾਲ ਪਿਆਰੇ ਦਿਓ ਆਹ ਦੀ ਕਹਿ ਨਹੀਂ ਦੂਰੇ ਆਪਣੇ ਨਾਲ ਦੇ ਨੂੰ ਫਿਰ ਆਪਣੇ ਨਾਲ ਦੇ ਨੂੰ ਲੈ ਦੇ ਜਿਵੇਂ ਕੋਰਬਾ ਜੀ ਕਹਿੰਦੇ ਚੱਟੇ ਜੱਟ ਦੇ ਕੱਪੜੇ ਮੈਲੇ ਜੱਟ ਕੋ ਰੋਈਓ ਉਹ ਆਪਣੇ ਨਾਲ ਨੂੰ ਕਹਿ ਦੇ ਇਹਨਾਂ ਦਾ ਅੱਲਾ ਦੇ ਨਾਲ ਗੱਲ ਤੇ ਬਲਪ ਸੜਦਿਉ ਆਪੇ ਆ ਰਹਾ ਸਾਨੂੰ ਇਸ ਕਾ ਇਹ ਐ ਉਹ ਐ ਹੁਣ ਸੱਚ ਲਗਾ ਕੋਈ ਨਹੀਂ ਦੂਰ ਕੰਨੇ ਦੂਰ ਓਕੀ ਕਰਦਾ ਬੜੀਆਂ ਚੱਕੜ ਕਰਦਾ ਦੂਰ ਕਰ ਉਧਰ ਕਹਦਾ ਜਾਂਦੂ ਗੁਰਮੁਖ ਦਾ ਵੀ ਪੈਂਦਾ ਮੈਂ ਬੜ ਬੜੇ ਤਰੀਕੇ ਜਾਂਦਾ ਨੇ ਸੁਨੇ ਜਾਂਦੇ ਨੇ ਹੋਦਾ ਹੋਰੇ ਸਮਝਦੇ ਨੇ ਦੱਸਦੇ ਦੂਰ ਕਰ ਬਲ ਪਿਆਰ ਨਿਓ ਕਿ ਅੱਲਾ ਦਾ ਭਜੇ ਕੰਬੜੀ ਰਾਂ ਦਾ ਟੁੱਟੇ ਜੂ। ਉਹ ਅਬੜੀ ਗੱਲ ਕਰਤੀ ਹੁਣ ਗੁਰਮੁਸਲਮ। ਲੋਕ ਦਾ ਭਾਈ ਜਾਂਦੇ ਨਹੀਂ। ਤਾਂ ਸੇਰੇ ਮੈਂ ਹੋ ਕੀ ਕਰੀਂ? ਜਿਹਦੀ ਜਾਂਦਾ ਤਾਂ ਦਿਓ ਡੋੜਦਾ। ਸੁਲੰਗਾ ਤੇ ਜੇ ਕੰਬੜੀ। ਨਝਾਨਾ ਦਾ ਤੇ ਵੀ ਪਹਿਣਾ ਹੈ ਤੇ ਮੈਨੂੰ ਮਾਰ ਲਿਗਣਾ। ਥੱਲੇ ਟਿਕਣੀਆਂ ਲੋਕਾਂ ਨੇ ਦੇਖ ਲਈਏ। ਆਹੇ ਕਹਿੰਦਾ ਮਤ ਨਾਲੀ ਹੋ ਜਾਏ। ਕਹਿੰਦਾ ਮਤ ਨਾਲੀ ਨਹੀਂ ਹੋਈ। ਉੱਠੀ ਬੱਤ ਜੀ ਲਈ ਉਹ ਰੁਪ ਭਲਾਵਾ ਪੱਗਦਾ ਹੋ ਗਿਆ ਨਾ ਰਾਦੂਆ ਫੜ ਲਿਆ ਰਾਦ ਫਟ ਗਿਆ ਮਤ ਮਾੜੀ ਹੋ ਜਾਏ ਹੁਣ ਕਹਿੰਦਾ ਮਤ ਮਾੜੀ ਹੋ ਜਾਂਦੀ ਹੈ ਉਹ ਮਾੜੀ ਮਾਦੀ ਮਾੜ ਰਸੂਆ ਉਂਮੀਚ ਲੋਕ ਦੇਖਣ ਪਹਿਲਾਂ ਫਰੀਦ ਆਏਗਾ ਨਾ ਤਾਂ ਹੁਣ ਨਹੀਂ ਕਹਦਾ ਕਹਿੰਦਾ ਜੋ ਮਰਜੀ ਕਰਨੋ ਪ੍ਰੋਬਲਮ ਫਰੀਦ ਨੂੰ ਹੀ ਆਇਆ ਪਹਿਲਾਂ ਕੀ ਕਹਿੰਦਾ ਸੀ ਜੱਲਾ ਦਾ ਪਿਛੇ ਕਮੜੀ ਇਹ ਕਮੜੀ ਜਿਹੜੀ ਹੈ ਕਿ ਜੋ ਵੀ ਜਿਹੜਾ ਕਮੜੀ ਸੀ ਮੇਰੀ ਫੁੱਤ ਜੀ ਚੀਜ਼ਾਂ ਵਾਂ ਦਲੀਆ ਕਮੜੀ ਸੀ ਛਾਤਰਾ ਨੇ ਮਗਲ ਲਾ ਗਈ ਜਿਹੜਾ ਪੜਿਆ ਨਾ ਰਾਂ ਦਾ ਤੋਤੇ ਦਿਓ ਫਿਰ ਕਹਾਂ ਪੁੱਝੋ ਸੰਜੇ ਖਪੜੀ ਜਿਹੜੀ ਕਮੜੀ ਪੁੱਤੀ ਜਿੱਦੀ ਭਿਜੂਗੀ ਦੀ ਸੁਰਜੂ ਏ ਜਿੱਦੂ ਸਭ ਇਹ ਉਹ ਪੋਨੀਓ ਸਭ ਜਾਵੇ ਹੋੜੀ ਹੋਵੇ ਬੋਝ ਤੇਰਾ ਇੱਕ ਮਾਰ ਦਾ ਬੋਝ ਹੈ ਕਿ ਜੋ ਸੱਚੋ ਕਬੜੀ ਅੱਲੋ ਵਰਸੇ ਅੱਲੋ ਅੱਲਾ ਨੇ ਵੀ ਬਸਾਇਆ ਹੋਰ ਕਦਰੋਂ ਕਦਰ ਕਾਇਮ ਹੋਊਗਾ ਹੋਰ ਕਦਰੋਂ ਪੱਕਾ ਹੋਊਗਾ ਹੈ ਅੱਲੋ ਵਰਸੇ ਵੀ ਅੱਲਾ ਨੇ ਵੀ ਬਸਾਇਆ ਸਭ ਸੁਣ ਜਰਾ ਇਹਨੂੰ ਕਬੜੀ ਜਾਇ ਮਲਾ ਤਾਂ ਸੱਜੂ ਉਸ ਆ ਜਗਨ ਦੀ ਮੈਂ ਵੀ ਜਾਵਣਾ ਸੱਜਣਾ ਫਿਰ ਭਾਵੇਂ ਜਨਾਇਆ ਤਾਂ ਮੇਰੇ ਸਾਰੀ ਗੱਲ ਕਲੀਅਰ ਆ ਸਾਰੀ ਗੱਲ ਕਲੀਅਰ ਆ ਇੱਕ ਆਲਾ ਕਨਸੈਪਟ ਜਿਹੜਾ ਹੋ ਰਿਹਾ ਹੈ ਹਾਂ ਜੀ ਉਹਦੇ ਸੱਜਣਾ ਰੋਜ਼ ਉਹਦੇ ਬਹੁਤ ਜ਼ਿਆਦਾ ਨਹੀਂ ਕਿ ਪਤਾ ਲੱਗਦਾ ਸਾਰੀਆਂ ਲਿਆ ਕੇ ਕੁੜੀਆਂ ਮਿਲਦਾ ਵੀ ਠੀਕ ਹੈ ਗੱਲ ਆਈ ਹੈ ਕਹਿੰਦਾ ਚੱਲਦੇ ਹੋ ਆ ਉਹ ਦੇਖੋ ਉਹ ਵੀ ਇਹ ਕਹਿੰਦਾ ਹੈ ਉਹ ਇਹਦਾ ਮਤਲਬ ਨੂੰ ਹੈ ਹੈ ਹੈ ਬਈ ਇਹ ਵੀ ਪਤਾ ਪਰ ਆਪਾਂ ਨੂੰ ਪਤਾ ਹੈ ਕੀ ਪ੍ਰਭੂ ਕੋ ਸਿਮਰੇ ਸਦਾ ਬਲਮਾਸੀ ਪ੍ਰਭੂ ਕੋ ਸਿਮਰੇ ਸਦਾ ਬਲਮਾਸੀ ਜਿਹੜਾ ਪ੍ਰਭੂ ਕੋ ਸਮਝਦਾ ਵੇਖੋ ਸਦਾ ਬਨਾਸੀ ਹੈ ਹੁਣ ਸਦਾ ਬਨਾਸੀ ਜਮੈਂ ਇਹਦਾ ਮਲਾ ਚੁੜੀ ਕੇ ਉਤਰੀਦੀ ਮਾਇਆ ਨਾਲ ਜੁੜਦਾ ਹੀ ਨਹੀਂ ਮਾਇਆ ਦੀ ਕੋ ਖਾਇੋ ਨਹੀਂ ਉਹਦਾ ਨਾ ਚੁੜੀ ਜੇ ਹੁੰਦਾ ਬ੍ਰੇਂਚ ਜਿਨਾਂ ਚ ਰੋਪਵਾ ਉਹ ਬ੍ਰੇਂਚ ਬ੍ਰੇਂਚ ਚਾਂਸ ਨੇ ਨਾ ਹੁੰਦੇ ਆ ਮਿੱਟੀ ਜਾਂਦਾ ਉਹਦਾ ਤਾਂ ਆਪਦਾ ਖਾਂਦਾ ਅਜੋਕੋ ਖਾਦਾ ਸਰੇ ਖਾਂਦਾ ਰਵਾਸ ਤੇ ਬਣਾ ਨਹੀਂ ਮੂੰਹ ਚਲਦਾ ਮੂੰਹ ਨਹੀਂ ਚਲਦਾ ਖੁਹਾਦੀ ਹੁੰਦਾ ਖਾਪੀ ਨਹੀਂ ਹੁੰਦਾ ਉਹ ਕਹਿੰਦਾ ਸਰੇ ਮਿੱਟੀ ਖਾਂਦਾ ਇਹਦਾ ਕੋਈ ਮਿੱਟੀ ਹੈ ਦਾ ਮਿੱਟੀ ਹੈ ਕਹਿੰਦਾ ਮੇਰਾ ਸਿਰ ਖਾਂਦਾ ਮੈਂ ਨਹੀਂ ਖਾਂਦਾ ਉਹ ਕਿਹਨੇ ਜੋ ਪਦਾਰਥ ਨੇ ਮਿੱਟੀ ਹੈ ਮਿੱਟੀ ਤੋਂ ਪੈਦਾ ਹੋਇਆ ਸਰੀਰ ਖਾਂਦਾ ਸਰੀਰ ਦਾ ਹੈਡ ਸਰੇ ਹੈ ਦੇ ਸਰੀਰ ਹਰਦਾ ਬਹਲਾ ਦਾ ਸਿਰੇ ਮੰਨਿਆ ਸਤਿਗੁਰੂ ਆ ਬਾਖੀ ਨੇ ਹਾਂ ਆਡੀਟਾ ਕੋਲ ਬ੍ਰੇਨ ਕੋਲੇ ਹੈ ਸਾਰਾ ਕੁਝ ਉਤੇ ਹੈ ਜੀਵ ਉਤੇ ਹੈ ਗੂ ਉਤੇ ਹੈ ਥਣ ਦੋਜ ਵਾਲਿਆਂ ਉਤੇ ਹੈ ਬ੍ਰੇਨ ਉਤੇ ਹੈ ਸ਼ਕਤੀ ਉਤੇ ਹੈ ਸਮਝ ਉਤੇ ਹੈ ਬੁੱਧ ਉਤੇ ਸਭ ਕੁਝ ਉਤੇ ਹੀ ਹੈ ਐ ਸਿਰਾਂ ਨੇ ਉਹ ਲਗੈ ਨੇ ਥੱਲੇ ਦੀਆਂ ਸੱਜੇ ਸੱਜੇ ਮਨ ਕਰਦੇ ਕਿ ਕਿ ਅਤਨਾ ਨੇ ਦੱਸਦਾ ਕਰਾਦਾ ਮਨ ਕੋ ਸੱਜੇ ਸੱਜੇ ਸੱਜੇ ਕਦੇ ਮੁੱਲ ਕਿਹਾ ਹੀ ਨਹੀਂ ਕਿਸਨੇ ਨੂੰ ਸਲਾਮਾ ਕਹਿੰਦੇ ਨੇ ਤੇ ਕੋਈ ਇਹ ਹੈ ਨਾ ਦੋ ਗੋ ਜੀ ਇੱਥੇ ਆ ਸਿਰ ਸਿਮਰਨ ਤੇ ਲੱਗੇ ਜਿਨ ਆਪ ਦੇ ਸਿਮਰਨ ਤੇ ਜੇ ਲੱਗੇ ਆਪ ਦੇ ਅੱਲਾ ਸਮਨ ਤੇ ਲੱਗੇ ਜਿਹਨ ਤੇ ਲਾਗੇ ਜਿਹਨ ਆਪਦੇ ਅੱਲਾਹ ਆਪਦੇ ਅੱਲਾਹ ਜਿਹੜੇ ਧੋਏ ਜਾਂ ਸਮਨ ਤੇ ਲੱਗ ਜਾਂਦੇ ਨੇ ਇਹ ਸਮਨ ਤੇ ਧੋਏ ਲੱਗੇ ਨੇ ਆਤਮਾ ਪ੍ਰਤਮ ਨੂੰ ਕੋ ਕੇ ਆਹ ਹੁਣ ਸਮਨ ਤੇ ਕੱਲਾ ਨਹੀਂ ਹੁੰਦਾ ਜਪਨ ਮਨਵਤੀ ਹੁੰਦਾ ਹੈ ਸਮਨ ਦੀ ਚੇਤਨੀ ਹੁੰਦਾ ਜਦੋਂ ਜਪਨ ਕਿ ਜਪਣ ਜਦੋਂ ਜਪਣ ਦੇ ਮਨਾਂ ਨੂੰ ਬੁਧੀ ਹੁੰਦੇ ਨੇ ਮਨਾ ਅੰਡਲਾ ਕਿਹੜਾ ਚੇਤਨਤਾ ਬੁਧੀ ਮਨ ਬੁਧੀ ਜਦੋਂ ਮਨ ਮੰਦੀ ਜਪਣ ਚਲ ਕੇ ਚੱਲ ਆਸੇ ਮਨ ਦੀ ਜਪਣ ਚੱਲ ਚਾਹੁੰਦਾ ਨਹੀਂ ਜਪੜ ਉਹ ਤਾਂ ਜਪ ਕੇ ਲਾਣਾ ਆ ਕੱਲ੍ਹ ਨਹੀਂ ਕਿ ਆਪਣਾ ਜੋ ਤਾਂ ਇਹਦਾ ਸੂਡਾ ਪੜਾ ਦਿੰਦੇ ਸੰਤਾ ਇਹਦਾ ਨਹੀਂ ਉਹ ਮੰਨਉ ਪੜਾ ਰਹੇ ਨੇ ਮਨ ਥੋੜੀ ਹੈ ਮਤਲਬ ਜੋ ਬੁੱਧੀ ਕੋਲ ਆ ਦੇ ਉਹ ਨੂੰ ਬੋਧਾ ਲੱਗਦੇ ਬੁੱਧੀ ਨੂੰ ਤਾਂ ਜਾਨਵਰ ਹੁੰਦਾ ਇਕ ਜਦ ਆਦਮੀ ਹੁੰਦਾ ਉਹ ਤਾਂ ਜਾਨਵਰ ਸਮਝਿਆ ਹੋਇਆ ਹੈ ਇਹ ਇਹ ਜਿਹੜੀ ਕੋ ਮਤਲਬ ਆ ਗਿਆ ਜਿਹੜਾ ਆਇਆ ਤਾਂ ਫਤਵਾ ਆਇਆ ਦਬਰਵਾ ਉਸ ਬਨਨ ਤਾਂ ਦੁਆ ਪੈਂਦਾ ਏ ਬਾਸ ਤੇ ਅਸਰ ਚੋ ਕਈ ਲੋਕ ਜਾਂਦੇ ਨਹੀਂ ਗੁਰਦਾਰੇ ਮਹਨ ਕਰਦੇ ਨਹੀਂ ਆਣੀ ਨਹੀਂ ਪੜਦੇ ਧਰਮ ਦਾ ਹੁੰਦਾ ਹੀ ਉਹ ਉਹਨਾਂ ਦਾ ਮਨ ਬਹੁਤ ਆ ਹੈ ਜਿਆਦਾ ਉਹ ਮਨ ਕੋਈ ਅਸਰ ਚੋ ਮਨ ਮੇਕਲ ਬੈਠਾ ਆ ਉਹ ਉਹ ਤਾਂ ਹੁੰਦਾ ਹੀ ਨਹੀਂ ਹੈ ਜਿਹੜਾ ਮਨ ਮੰਨੇ ਨਾ ਇਦਾਂ ਨੂੰ ਥੋੜਾ ਜਿਆ ਸੁਣ ਕੇ ਵੀ ਆ ਜਿਵੇਂ ਫਬਾਹ ਸੁਣਦੇ ਆ ਧਰਮ ਬੰਦ ਜਿਹਦਾ ਚੁਕਾ ਹੋਵੇ ਉਹ ਕਹਦਾ ਮੈਂ ਪਹਿਲਾਂ ਚੁਕਾ ਤਾ ਕਹਿੰਦਾ ਬਹੁਤੀ ਫੇਰ ਵੀ ਦਿਨਾਈ ਕਰੀ ਜਾਂਦਾ ਮਾਨੂੰ ਸਭੀ ਕਦੇ ਵੀ ਬਹੁਤੀ ਜਾਂ ਦਿਨਾਈ ਕਰੀ ਜਾਂਦਾ ਮਾਨੂੰ ਸੇਵਰਨ ਤੇ ਲੱਗੇ ਜਨ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਬਾਣ ਕੇ ਜਨ ਕੀ ਹਾਂ ਇੱਕ ਗੱਲ ਹੋ ਰਹਾ ਦੇ ਅੱਲਾ ਦੇ ਨਾਲ ਪਰਮੇਸ਼ਰ ਵੀ ਆਜਣਾ ਵਿੱਚੇ ਪਰਮੇਸ਼ਰ ਦੀ ਕਿਰਪਾ ਵੀ ਆਪ ਤੇਰੀ ਤਾਂ ਲੱਗਿਆ ਹੋਇਆ ਹੈ ਲਾਇਆ ਵੀ ਉਹਦਾ है। ਹੈ ਮੁਰਕੂ ਕਾਹਦੇ ਵਾਸਤੇ ਕਰਦਾ ਵੀ ਆਪਣੇ ਹੰਤਪ ਰਾਈ ਨਾ ਦਾਦੀਓ ਔਰ ਉਸਰ ਬਣਾਈ ਦੀ ਨਾ ਔਰਤਾਂ ਸਰ ਬਣਾਈ ਦੀ ਨਾ ਆਹ ਖੇਡਦਾ ਔਰ ਨਾਲ ਸ਼ਿਕਾਰ ਜਿਹੜਾ ਆਪ ਜੋ ਜਾਣਕਾਰ ਕਿ ਉਹਨੇ ਲਈ ਹੌਲੀ ਚਲਾਉਣਾ ਕੋਤਾ ਕਾਦੇ ਪਾਲਦਾ ਕੋਈ ਆਪਣੇ ਬਜ਼ੁਰਗ ਨੂੰ ਪਾਲਦਾ ਇਹਨਾਂ ਸਿਰ ਆਪਣੇ ਰਿਖਵਾਲੀ ਵਾਸਤੇ ਪਾਲਦਾ ਵੀ ਮੇਰੇ ਜਿਹੜੀ ਜੰਤਾ ਹੈ ਜੀ ਰਿਖਵਾਲੀ ਹੋਵੇ ਉਹ ਮੋਟਰਾਂ ਪਹੁੰਚਣ ਵਾਲੇ ਚੋਪਰਾਂ ਉਹ ਤੇਰਾ ਪਹੁੰਚਣਾ ਹੈ ਇੱਕ ਤਾਂ ਪੜਾਉਂਦੇ ਇੰਤਜ਼ਾਮ ਕੀਤਾ ਕਿ ਸਾਰੇ ਪੌੜੀਓ ਚੜ੍ਹ ਇਹ 에어ਪੋਰਟ ਤੋਂ ਥੱਲੇ ਸਿੜੀ ਜਾਂਦੇ ਆਦਮ ਚਨਾਲੀ ਕੋ ਇਬਰਾਹੀਮ ਵੀ वो तो दुखी फी हो गईता है कपू वो वाली याद ना दे दी मुक्ति के खिलाफ ना सारे लोग राजा खिलाफ मुक्ति से विष्णु विष्णु पुराण पढ़ो शिव खिलाफ मुक्ति से ब्रह्मा खिलाफ मुक्ति से देना खिलाफ ना मुक्ति तो ਇਹ ਉਹ ਮਾਸਾਕੀ ਬੜੀਆਂ ਨਾਲ ਦੇ ਵਿੱਚ ਦੰਦਾ ਜਾਂਦੇ ਨੇ ਨਾ ਅਰਧਿਸ਼ਕਾਇਤ ਲੋਕ ਅਰਧਿਸ਼ਕਾਇਤ ਨਹੀਂ ਕੀਤੇ ਜਾ ਕੇ ਪਰਮੇਸ਼ਰ ਕੋ ਕਹਿੰਦੇ ਜੀ ਅਸੀਂ ਸ੍ਰਿਸ਼ਟੀ ਬਿਜ ਨੂੰ ਮੈਂ ਪਾਲਣਾ ਕਰਦਾ ਉਹ ਬ੍ਰਹਮ ਲੈਣਾ ਮੈਂ ਪਹਿਲਾ ਕਰਦਾ ਉਹ ਸ਼ਿਵ ਕਰਨ ਉਹ ਚ ਮਾਤਾ ਮਹਾਦਾਈਆਂ ਪਰ ਮਾਤਾ ਸਾਵਨਾ ਮਾਰਦਾ ਛੋੜੀਆ ਕੀ ਤਾਂ ਇਹ ਤਾਂ ਸਾਰਿਆਂ ਨੂੰ ਮੁਕਤ ਕਰੀਏ ਤੇ ਸਾਰਿਆਂ ਦੇ ਰਸੇ ਖੋਤੇ ਨੇ ਗਿਆਨ ਦੇ ਕੇ ਤੇ ਐਡੀ ਸੇ ਛੇਟਾ ਖਤਮ ਨਹੀਂ ਹੋ ਆਪਣੀ ਰਤੀ ਸੇ ਸਤੀ ਬਣੋਲੀ ਆ ਮੁਕਤ ਕਰ ਦਿੰਦਾ ਜੇ ਦੀ ਸ਼ਿਕਾਇਤ ਕਰਤੀ ਦੀ ਜਾ ਕੇ ਕਥਾ ਜੈਸੋ ਸੁਖਿਉਂ ਆ ਕਥਾ ਹੈ ਬੇਵੋਲਾ ਨੇ ਬ੍ਰਹਮਾ ਸਾਥੋਂ ਆਉਂਦਾ ਲਾਜੁਮ ਸਾਥ ਲਿਆ ਜੋ ਵੀ ਕੀ ਅੱਲਾ ਤੇਰੀ ਸ਼ਹਾਦਤ ਕਰਦਾ ਨਾ ਕਿਸ਼ ਕਰਦਾ ਨਾ ਅਟਾ ਟੂ ਆਣਾ ਦੇ ਜਿਹੜਾ ਬਣਾਇਆ ਹੋਇਆ ਸ੍ਰਿਸ਼ਟੀ ਹੈ ਉਹਨੂੰ ਦੁਨੀਆ ਗਲਾ ਫੋੜੀਆਂ ਖੋਲੀਆਂ ਦੇ ਉਹ ਵੀ ਹੋਈ ਜਾਂਦਾ ਤੁਸੀਂ ਪਹਿਲੀ ਡਿਊਟੀ ਕਦੋਂ ਨੂੰ ਰਾਹੀ ਹੈ ਨਾ ਦੀ ਡਿਊਟੀ ਨਾ ਤੇ ਕਬੂ ਕਰੀਆ ਆਪਣਾ ਕੰਮ ਕਰਦਾ ਨਾ ਕਰਦਾ ਕਹਾਂ ਪਈਓ ਚੁੱਪੋ ਭਰੋਗੀ ਕਾ ਮੈਨੇ ਡਿਊਟੀ ਨਹੀਂ ਲਈ ਮੈਨੇ ਡਿਊਟੀ ਨਹੀਂ ਲਈ ਤਾਂ ਕੈਨਡਾ ਲਈ ਹੋਈ ਹੈ ਡਿਊਟੀ ਤੁੜਕਾ ਮੈਂ ਬੋਲੇ ਭਲਾ ਚਲੋ ਫਰਮਾਇ ਸਰ ਕਰਨ ਲੱਗਿਆ ਬਹੁਤ ਕੋਸ ਉੱਤੇ ਆਇਆਗਾ ਗਾਘੀਆਂ ਜੋ ਉਹ ਕਦੀ ਦੀ ਗੱਲ ਸਮਝਾਤੀ ਕਿੰਨੇ ਨੇ ਥੇ ਸਭ ਤੋਂ ਸਖਿਆ ਦੇ ਨਾਲੇ ਤਰਪੂ ਬਿਸ਼ੂ ਜੀ ਚਲੇ ਉਹ ਕੀ ਕਰਦੇ ਨੇ ਕੀ ਕਬੂਲ ਹੈ ਜੇ ਕੰਮ ਹੈ ਤਾਂ ਮੁਕਤੀ ਵੀ ਚਾਹੁੰਦੇ ਬਿਲਕੁਲ ਉਹ ਕਹਨ ਵੀ ਤੂੰ ਆਏ ਘਰ ਤੇ ਤੇ ਲੋਕ ਤੂੰ ਜਾ ਸਕਦਾ ਬੰਦਾ ਕਹਨ ਤੇ ਨਾਲ ਲੋਕਾਂ ਨਾਲ ਜਾ ਸਕਦਾ ਨਾਲ ਤੇ ਨਾਲ ਲੋਕਾਂ ਨਾਲ ਆਣਾ ਆਪਾਂ تین ਲੋਕ ਕਰੇ ਇਹ ਲੋਕੀ ਬਾਤਾਂ ਕਰਦੇ ਨਹੀਂ ਇਹਦੇ ਨਾਲ ਸਾਰੀ ਹੈ ਤੱਲੀਆ ਗੱਲ ਨਾਲ ਸਾਖੀਆਂ ਮਲਾਦੇ ਸੋਣ ਨੂੰ ਫਿਰ ਉਹਨੂੰ ਵੀ ਗੱਲ ਕੀਤੀ ਹੈ ਸਾਖੀਆਂ ਨਾ ਰਿਆਈਆਂ ਹੋ ਜਾਣੇ ਉਹ ਕਹਿੰਦਾ ਤੂੰ ਐਂਟੀਆਂ ਘੜੀਆਂ ਤੋਂ ਜ਼ਿਆਦਾ ਇੱਕ ਸੰਤ ਹੈ ਵੀ ਸਰ ਟਾਈਮ ਦੇ ਤਾ ਥੋੜਾ ਜਿਆਦਾ ਦੇ ਰੁਕੂਗਾ ਤਾਂ ਗਿਆਨ ਦਿਰਾਊਗਾ ਇਹਨੂੰ ਟਾਈਮ ਦੇ ਥੋੜਾ ਦੇ ਦੋ ਕਿਰਾਂ ਗਿਆਨ ਨਹੀਂ ਕਰਾਇਆ ਨਾ ਸਕੇ ਆ ਗਿਆ ਹੋਇਆ ਲਾਗ ਲਿਖਿਆ ਹੋਇਆ ਇਸ ਕਰਕੇ ਹਮੇਸ਼ਾ ਨਾਲ ਦਾ ਹੱਦੇਗਾ ਦੀਹੇਂਦਾ ਜਿਹੜਾ ਗਿਆਨ ਹੁੰਦਾ ਕਿਸੇ ਕੋਲ ਜਿੰਨਾ ਕੋਲ ਉਹ ਆਪਾਂ ਦੇਖ ਕੇ ਚਲਾ ਜਾਂਦਾ ਪਿੱਛੋਂ ਤੂੰ ਇਹ ਤਾਂ ਕਿਆਨ ਨਹੀਂ ਨਾ ਦੂਜਾਂ ਦਾ ਅਟਵਰਕ ਬੜਿਆ ਹੁੰਦਾ ਥੋੜਾ ਜਿਹਾ ਚੁੱਪ ਕਰਦੇ ਨਹੀਂ ਉਹਨਾਂ ਇਤਹਾਲੇ ਨਾ ਕਿ ਚੁੱਪ ਕਰਨਾ ਪੈਂਦਾ ਕਦੇ ਉਹਨੂੰ ਚੁੱਪ ਕਰਨਾ ਪੈਂਦਾ ਕਦੇ ਉਹਨੂੰ ਚੁੱਪ ਕਰਨਾ ਪੈਂਦਾ ਸਭ ਇਹ ਕਿੰ ਚੱਲਦਾ ਰਹੇ ਕੋਈ ਨਾ ਪਹਿਲਾਂ ਆਇਆ ਵਿਛਤ ਹਨ ਆਪਣੋ ਤਕਤ ਰਹਿ ਉਹਦੇ ਬਾਅਦ ਫੇਰ ਉਹ ਗਿਆਨਤਾ ਵੀ ਫੇਰ ਆ ਗਿਆ ਬਹੁਤ ਬਲ ਕੀ ਬਤਾਰ ਆ ਗਿਆ ਫੇਰ ਬਲ ਕੀ ਬਤਾਰ ਆ ਵਿੱਚ ਗਾਇਬ ਪਊਗਾ ਹੀ ਪਊਗਾ ਗੁਰੂਆਂ ਲਈ ਤੇ ਇਹਦਾ ਮਤਲਬ ਇਹੀ ਹੈ ਗੁਰੂ ਦੇ ਭਗਤਾਂ ਦੇ ਆਲ ਗੁਰੂਆਂ ਦੇ ਗਾਇਬ ਹੈ ਇਹ ਤਾਂ ਛੇਤੀ ਹੀ ਤੁਹਾਨੂੰ ਪਰਮੇਸ਼ਰ ਨੇ ਅਗਾ ਹੁਣੇ ਆਗੇ ਤਾਂ ਇਹ ਲੋਕਾਂ ਦੇ ਜ਼ਿਹਨ ਚ ਸੀ ਹੀ ਪਕਤਾਂ ਦੀ ਗੱਲ ਹਾਂ ਗੱਲ ਚੱਲਦੀ ਬਈ ਜਦੋਂ ਜਲਦੀ ਸੀ ਫਿਰ ਬੜਾ ਬੜਾ ਨਾਮ ਨੂੰ ਭੇਜਦਾ ਜਾਂ ਰੱਬ ਬਿਲਕੁਲੇ ਬੰਦ भी ਸਾਰੇ ਫਿਰ 10 ਹਫਤਾਰ ਦਿੱਤੇ ਫਿਰ ਪਿੱਛੋਂ ਫਿਰ ਵੀ ਤੇ ਕੋਈ ਕਿੱਡਾ ਬੜਾ ਕੁਝ ਕਰਕੇ ਇਹਦੇ ਬੁੱਦੇ ਮਾਰ ਕੇ ਇਹਦੇ ਸਰਾਂ ਵਿੱਚ ਬੁੱਲ ਪਾ ਕੇ ਫਿਰ ਜੜ ਪੱਟੀ ਇਸੇ ਦੀ ਵਿਚਾਰਧਾਰਾ ਦੀ ਹੋ ਕੁਛ ਨਹੀਂ ਜਾਜੂ ਵਿਚਾਰ ਤਾਂ ਅਜਰੌਣਾ ਕਰ ਨਹੀਂ ਸਕਦੇ ਹੋ ਦਰਦੇ ਦੀ ਮੈਂ ਇਸ ਵਿਚਾਰਧਾਰਾ ਦੇ ਖਿਲਾਫ ਜੀ ਕਰਦੀ ਸੋ ਵਰਲਡ ਹੁਣ ਗਿਆਨਵਾਦ ਹੋ ਗਿਆ ਪਰ ਜਿਹੜਾ ਇਹਦੇ ਵਿਚਾਰ ਖਿਲਾਫ ਕਰੂਗਾ ਉਹਦੀ ਬੁੱਧ ਸਾਰੇ ਬੈਠੀ ਅੱਗੇ ਦੀਆਂ ਸਰਕਾਰਾਂ ਨੂੰ ਟਾਈਪ ਦੀ ਸੀ ਹੁਣ ਉਹ ਸਰਕਾਰਾਂ ਨਹੀਂ ਰਹੀਆਂ ਨਾ ਉਹ ਜੋ ਬਤੇ ਰਹੇ ਅੱਗੇ ਉਹ ਢੀਮੇ ਤਾਲੂ ਸੀ ਨਾ ਜਿਹੜੇ ਉਹ ਹਾਵੀ ਤੇ ਲੋਕਾਂ ਅੱਲੇ ਵਾਲੇ ਤਾਂ ਸੀ ਅਗਲੇ ਫਲੋਟ ਇਹ ਮਨਵਤਾਲ ਉਹ ਚੋ ਬਾਹਰ ਨਿਕਲ ਗਏ ਅਗਲੇ ਤਾਂ ਮੈਂ ਤਾਂ ਰੁਕ ਮੁਦ ਦੇਈ ਦੀ ਇਸਲਾਮ ਵਾਲੇ ਵੀ ਕਹਿੰਦੇ ਨੇ ਵੀ ਸਾਡੇ ਕੋਲ ਨਹੀਂ ਹੈ ਕੋ ਸੈਟੀਸਫਾਈ ਕਰਾਉਂਗਾ ਹੁਣ ਸੈਟੀਸਫੈਕਸ਼ਨ ਚਾਹੁੰਦਾ ਮਤਲਬ ਜਿਹੜਾ ਜਮਾਨਾ ਕਹ ਲੋ ਵਰਲਡ ਕਹ ਲੋ ਸਾਨੇ ਬੰਦੇ ਸੈਟੀਸਫੈਕਸ਼ਨ ਚਾਹੁੰਦੇ ਸੈਟੀਸਫਾਈ ਕਰਾਉਂਦੇ ਜਿਹੜਾ ਸਾਢੇ ਦਾ ਕਰਾ ਦੂਗਾ ਉਹ ਧਰਮਾਂ ਵਾਕ ਹੀ ਸਮਝਦਾ ਜਿਹੜਾ ਬਲਾਈ ਲਾਮਾ ਨੇ ਕਿਹਾ ਨਾ ਵੀ ਝੂਠ ਕੱਢਦੀ ਏ ਸੋਖੀ ਗੱਲ ਨਹੀਂ ਕਹਤੀ ਮੰਨ ਗਿਆ ਵੀ ਝੂਠ ਸਾਡੇ ਹੈ ਧਰਮ ਝੂਠ ਹੈ ਇਹ ਧਰਮ ਵਿੱਚ ਝੂਠ ਤੜਕਾ ਦੇਣਾ ਫਿਰੋ ਬਸ ਤਾਂ ਗੇਈ ਨਾ ਛੋਟੀ ਗੱਲ ਛੋਟੀ ਹੈ ਇਹ ਤਾਂ ਚੁੱਪ ਕਰਕੇ ਸਮੋ ਗਾਹ ਹੀ ਦੀ ਜੇ ਗਾਹ ਬੋਲੇ ਕੱਕਰਾ ਹੋ ਜੂ ਕੀ ਗੱਲ ਸਾਰੀ ਗੱਲ ਜੀ ਸਿਮਰਨ ਤੇ ਲਾਗੇ ਜਿਨ ਆਪ ਦੇ ਅਲਾ ਨਾਨਕ ਜਨ ਕੀ ਮੰਗੇ ਰਹਾ ਜਿਨੂੰ ਜਾਲ ਨੇ ਆਪ ਲਾਇ ਰੂਸੇ ਬੁਲਦੇ ਸਬਦ ਗੁਰੂ ਦੇ ਉਹਦੇ ਰੱਬ ਨਾਲ ਬੁਲਦੇ ਗੋਤੋਂ ਤੋਂ ਪਹਿਲਾਂ ਪਹਿਲਾਂ ਆਪ ਕੱਚ ਬੱਚੀ ਭੂਖਾ ਪਹਿਲਾਂ ਪਹਿਲਾਂ ਕਾਚਿ ਹੋ ਸਕਦਾ ਹੈ ਨੇ ਆਹ ਪ੍ਰਕਿਰਿਆ ਤਾਂ ਆਪਾਂ ਹੀ ਕਰ ਲੈ ਲੋ ਬੜਾਣਾ ਜਿਸਾਂ ਤੋਂ ਰੁਪਈਆ ਨਾ ਹੋਇੰਦ ਤੱਕ ਪਹੁੰਚ ਰਹੀ ਜਿੱਥੇ ਖੜ ਕੇ ਉਹਨਾਂ ਨੇ ਗੱਲ ਕੀਤੀ ਤੇ ਪੂਰੇ ਪੂਰੇ ਸੰਦਰਭ ਵਿੱਚ ਜਿਵੇਂ ਗੱਲ ਕਹੀ ਹੈ ਜਿੱਥੇ ਖੜ ਕੇ ਉਹਨਾਂ ਨੇ ਗੱਲ ਕੀਤੀ ਹੈ ਉਸੇ ਪਲੇਟਫਾਰਮ ਤੇ ਖੜਨ ਦੀ ਕੋਸ਼ਿਸ਼ ਕਰੋ ਉੱਥੇ ਹੀ ਪਤਾ ਲੱਗਦਾ ਜਾ ਉਸੇ ਨੂੰ ਚਾਹੀਦੇ ਜਾਂਦੇ ਦਾ ਪਤਾ ਲੱਗਦਾ ਵੀ ਗੱਲ ਹੈ ਕੀ ਹੈ ਸਭ ਦੇ ਵਿੱਚ ਕੀ ਗੱਲ ਹੁਣ ਉਹ ਕਹਿੰਦਾ ਵੀ ਇਹ ਠੀਕਾ ਚਿੱਕੜ ਉਹਨੂੰ ਜਿਹੜਾ ਸੀ ਨਾ ਗੜੀ ਗੱਲੀ ਤੋਂ